ਤਾਂ कबीर जी ਜੀ ਦਾ ਨੰਨੇ ਅੱਖਰ ਤੋਂ 26 ਨੰਬਰ ਪੌੜੀ ਚ ਉਪਦੇਸ਼ ਹੈ ਜੀ ਨੰਨਾ ਨਿਸ ਦਿਨ ਨਿਰਖਤ ਜਾਈ ਨਿਰਖਤ है। ਰਹੇ ਰਤਵਾਈ ਨੰਨਾ ਨਿਸ ਦਿਨ ਨਿਰਖਤ ਜਾਈ ਲਗਾਤਾਰ ਦਨਨਾਤ ਜਿਹੜੀ ਤੁਹਾਡੀ ਸ਼ਬਦ ਵਿਚਾਰ ਨਿਰਖਤ ਨਿਰਖਲ ਪਰਖ ਕਰਦੀ ਸੱਚਾ ਝੂਠ ਦਿਨ ਰਾਤ ਸਾਡਾ ਨਿਰਖਿਣ ਦੇ ਵਿੱਚ ਜਾਣਾ ਚਾਹੀਦਾ ਵੀ ਸੋਚ ਸ਼ਬਦ ਵਿਚਾਰ ਤੇ ਵਤੀਤ ਹੁੰਦਾ ਚਾਹੀਦਾ ਸ਼ਬਦ ਵਿਚਾਰ ਕਰਨ ਵਾਲੇ ਦੇ ਜਿਹੜੇ ਬੁੱਧੀ ਹੈ ਲੈਣ ਦੀ ਜਿਹੜੀ ਰਹਿ ਰਤ ਵਾਲੀ ਨਾਮ ਦਾ ਰੰਗ ਚੜਦਾ ਰਹਿੰਦਾ ਲਾਲੀ ਚੜਦੇ ਚੜਦੀ ਰਹਿੰਦੀ ਹੈ ਨਿਰਖਤ ਨਿਰਖਤ ਜਦ ਤਬਲੇ ਨਿਰਖੈ ਨਿਰਖ ਮਿਲਾਵਾ ਯਾਦ ਢੋਲਦਾ ਢੋਲਦਾ ਢੋਣਦਾ ਢੋਣਦਾ ਵਿਚਾਰਦਾ ਵਿਚਾਰਦਾ ਸੱਚ ਦੇ ਨੇੜੇ ਚ ਜਾਂਦਾ ਹੈ ਸੱਚ ਦੇ ਸਾਹਮਣੇ ਸੱਚ ਦਾ ਆਪਣਾ ਸਾਹਮਣਾ ਹੋ ਜਾਂਦਾ ਹੈ ਨਿਰਖਤ ਨਿਰਖਤ ਜਦ ਜੈ ਪਾਵਾ ਜਦ ਪ੍ਰਾਪਤੀ ਹੋ ਜਾਂਦੀ ਹੈ ਸਮਝ ਆ ਜਾਂਦੀ ਹੈ ਜੋ ਨਿਰੀਖਣ ਕਰਨ ਵਾਲਾ ਲੱਭਣ ਵਾਲਾ ਢੋਲਣ ਵਾਲਾ ਹੈ ਜਿਹਨੂੰ ਢੋੜਦਾ ਉਹ ਵਿਕੇ ਸਮਾ ਜਾਂਦਾ ਸੱਚ ਨੂੰ ਲੱਭਣ ਵਾਲਾ ਸੱਚ ਦੇ ਵਿੱਚ ਹੀ ਸਮਾ ਜਾਂਦਾ ਦਰਿਆ ਚੱਲ ਰਿਹਾ ਸੀ ਨਿਰਖ ਕਰ ਸਮੁੰਦਰ ਦੇ ਨਾਲ ਦਰਿਆ ਦਾ ਆਮਣ ਮਲਾਪ ਹੋਇਆ ਤਾਂ ਸਮੁੰਦਰ ਦੇ ਵਿੱਚ ਹੀ ਦਰਿਆ ਲੀਨ ਹੋ ਗਿਆ ਸਮੁੰਦਰ ਮਿਲਿਆ ਦਰਿਆ ਨੂੰ ਤਾਂ ਦਰਿਆ ਸਮੁੰਦਰ ਦੇ ਵਿੱਚ ਹੀ ਸਮਾ ਗਿਆ ਹਾਂਜੀ अच्छा निरਖੇ ਤਾਂ ਨਿਰਖ ਮੰਚ ਦੀ ਗੱਲ ਹੋ ਰਹੀ ਹੈ ਜੀ ہاں ਨਰਖਣ ਵਾਲਾ ਲੱਭਣ ਵਾਲਾ ਜਿਹਨੂੰ ਲੱਭਦਾ ਸੀ ਉਹਦੇ ਵਿੱਚ ਹੀ ਸਮਾ ਗਿਆ ਤਾਂ ਉਹ ਇਹਨੇ ਇਹ ਦੇਖਿਆ ਸੋਈ ਮੁੜ ਕੇ ਤੂੰ ਤੇ ਜਾ ਕੋ ਕਹਤਾ ਔਰ ਜਿਹਨੂੰ ਹੋਰੂ ਢੋੜਦਾ ਸੀ ਉਹਦਾ ਤੇਰਾ ਆਪਣਾ ਵੀ ਮੂਲ ਸੀ ਜਿੱਥੋਂ ਦਰਿਆ ਪੈਦਾ ਹੋਇਆ ਸੀ ਉੱਥੇ ਹੀ ਆ ਗਿਆ ਉਹ ਜਾਣਾ ਹੋਰ ਕਿੱਥੇ ਸੀ ਦਰਿਆ ਨੇ ਸਮੁੰਦਰ ਚੋਂ ਦਰਿਆ ਪੈਦਾ ਹੋਇਆ ਸੀ ਗਿਆ ਕਿਸੇ ਹੋਰ ਰਸਤੇ ਸੀ ਛੱਡ ਕੇ ਛੱਡਿਆ ਹੋਰ ਆਇਆ ਕਿਸੇ ਹੋਰ ਰਸਤੇ ਆਇਆ ਜਿਮੀਨੀ ਰਸਤੇ ਤੇ ਵੀ ਜਿਆ ਆਕਾਸ਼ੀ ਰਸਤੇ ਤੇ ਵੀ ਜਦੋਂ ਅੰਡੋਆ ਸੀ ਉਦੋਂ ਆਕਾਸ਼ ਨਾਲ ਜੁੜਿਆ ਹੋਇਆ ਸੀ ਜੋਤ ਸੀ ਉਦੋਂ ਜਦ ਗਿਆ ਤਾਂ ਮਿੱਟੀ ਨਾਲ ਜੁੜ ਕੇ ਗਿਆ ਸਰੀਰ ਤਾੜਨ ਕਰਕੇ ਗਿਆ ਠੀਕ ਹੈ ਇਹ ਦੋਵੇਂ ਚੇਤਨਾ ਹੈ ਜੀ ਮਨਬੁੱਧੀ ਟੋਲਦੀ ਹੈ ਬੁੱਧ ਟੋਲਦੀ ਹੈ ਤੇ ਟੋਲਦੀ ਆਪਣੀ ਮੂਲ ਜਿੱਥੋਂ ਪੈਦਾ ਹੋਈ ਹੈ ਜਿਉਂ ਕੀ ਜਿੱਥੋਂ ਪੈਦਾ ਹੁੰਦੀ ਹੈ ਉੱਥੇ ਜਾ ਕੇ ਸਮੋਦੀ ਹੈ ਇਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਪ੍ਰੀਤ ਸੱਚੀ ਹੋਣੀ ਚਾਹੀਦੀ ਹੈ ਸਮਾਹ ਦੀ ਤਾਂ ਹੈ ਜੇ ਤੋ ਪੈਦਾ ਹੋਏ ਆਪਣੇ ਮੂਲ ਨਾਲ ਸੱਚੀ ਪ੍ਰੀਤ ਹੋਦੀ ਹੈ ਬਾਕੀ ਸਭ ਪ੍ਰੀਤਾਂ ਝੂਠੀਆਂ ਨੇ ਸੱਚੀ ਪ੍ਰੀਤ ਜੋ ਵੀ ਜੋਤ ਨਾਲ ਆਪਣੇ ਮੂਲ ਨਾਲ ਬਾਕੀ ਪ੍ਰੀਤ ਝੂਠੀ ਹੈ ਬਾਹਾਂ ਨਾਲ ਪ੍ਰੀਤ ਝੂਠੀ ਹੈ ਇਹ ਇੱਥੇ 26ਵੀਂ ਪੌੜੀ ਦਾ ਉਪਦੇਸ਼ ਭਗਤ ਕਬੀਰ ਜੀ ਦਾ ਸਮਾਪਤ ਹੋਈ ਤੇ ਗੁਰੂ ਨਾਨਕ ਸਾਹਿਬ ਵੱਲੋਂ ਤੇਹੀ ਵੀ ਪੌਲੀ ਚ ਨੰਨੇ ਅੱਖਰ ਦਾ ਉਪਦੇਸ਼ ਹੈਗਾ ਜੀ ਨੰਨੇ ਨਾ ਭੋਗ ਨਿਤ ਭੋਗ ਹੈ ਨਾ ਡੀਠਾ ਨਾ ਸੰਮਾਲਿਆ ਨੰਨਾ ਨਹੀਂ ਭੋਗਨੇ ਤੇ ਭੋਗਾਂ ਜਿਹੜੀ ਨਾ ਖਾਣ ਵਾਲੀ ਚੀਜ਼ ਹੈ ਨਾ ਭੋਗਣ ਵਾਲੇ ਭੋਗ ਖਾਣਾ ਰੋਜ਼ ਜੇ ਤੂੰ ਸੁਣਦਾ ਕਹਾਣੀਆਂ ਸੱਚੀਆਂ ਇਹ ਹਜ਼ਮ ਹੋਣ ਵਾਲੀ ਚੀਜ਼ ਕੋਈ ਨਹੀਂ ਹੈ ਕੋ ਸਾਡੇ ਜੋ ਹਜ਼ਮ ਹੋ ਕੇ ਸਾਡੇ ਸਰੀਰ ਦਾ ਹਿੱਸਾ ਬਣਦਾ ਉਹ ਭੋਗ ਭੋਗਣ ਵਾਲੀ ਨੂੰ ਚੀਜ਼ ਖਾਣ ਵਾਲੀ ਹੈ ਜਿਹੜੀ ਹਜ਼ਮ ਨਹੀਂ ਹੋਣੀ ਸਾਡੇ ਸਰੀਰ ਦਾ ਹਿੱਸਾ ਇਹ ਨਹੀਂ ਬਣਨਾ ਨਾ ਖਾਣ ਵਾਲੀ ਚੀਜ਼ ਹੈ ਤੇ ਸਾਖੀਆਂ ਦੇ ਵਿੱਚੋਂ ਸਿਮਰਤ ਸ਼ਾਸਤ੍ਰਾਂ ਦੇ ਵਿੱਚੋਂ ਕੁਝ ਵੀ ਸੱਚ ਨਹੀਂ ਹੈ ਕੁਝ ਵੀ ਸਾਡੀ ਬੁੱਧੀ ਨੂੰ ਤਾਂ ਗਿਆਨ ਪਰਚਾਣ ਨਹੀਂ ਕਰ ਸਕਦਾ ਇਹ ਨਹੀਂ ਬਣਦਾ ਸਾਡਾ ਕਿਵੇਂ ਅਸੀਂ ਜਿਹੜੇ ਸੰਸਾਰੀ ਚੀਜ਼ਾਂ ਖਾਂਦੇ ਹਜ਼ਮ ਨਹੀਂ ਹੁੰਦੀ ਉਹ ਸਾਡੇ ਸਰੀਰ ਦੇ ਵਿੱਚ ਦਾ ਹਿੱਸਾ ਨਹੀਂ ਬਣਦੀ ਇਸ ਕਰਕੇ ਖਾਣ ਵਾਲੀ ਚੀਜ਼ ਨਹੀਂ ਹੁੰਦੀ ਪਰ ਖਾਂਦਾ ਜੀ ਹੈ ਨਾ ਖਾਣ ਵਾਲੀਆਂ ਚੀਜ਼ਾਂ ਖਾਂਦਾ ਅਪਖ ਪਖਾਂ ਉਹ ਚੀਜ਼ਾਂ ਖਾਂਦਾ ਖਾਂਦੇ ਨੇ ਸਾਖ ਤਾਂ ਸੱਚ ਖਾਂਦੇ ਦੀ ਸੱਚ ਖਾਣ ਦਾ ਸਤ ਸਰੂਪ ਹੋ ਜਾਣ ਛੋਟ ਜਾਂਦੇ ਨੇ ਊੜਿਆ ਦਾ ਲੋਕ ਪਸੰਦ ਕਰਦੇ ਨੇ ਸੱਚ ਨਹੀਂ ਪਸੰਦ ਕਰਦੇ ਅਪਖ ਪਖਾਂ ਸਾਖ ਪਖਣ ਵਾਲੀ ਚੀਜ਼ ਤਾਂ ਜੇ ਉਹ ਤਜੀ ਹੋਈ ਹੈ ਛੋਟਾ ਹੈ ਠੀਕ ਹੈ ਠੀਕ ਹੈ ਜੀ ਨਾ ਡੀਠਾ ਨਾ ਸਮਾਲਿਆ ਨਾ ਦਰਸ਼ਨ ਹੋਇਆ ਜਿਹੜੀ ਖਾਣ ਵਾਲੀ ਚੀਜ਼ ਐ ਨਾ ਤਾਂ ਉਹ ਸਮਝਾਈ ਡੀਠਾ ਨਾ ਉਹਦੇ ਵਿੱਚ ਸਮਾਇਆ ਸਮਾਉਣਾ ਵੀ ਆਪਣੇ ਮੂਲ ਦਾ ਗਿਆਨ ਖਾਣਾ ਸੀ ਬ੍ਰਿਮ ਗਾਂਧੀ ਦਾ ਪੋਜਨ ਗਿਆ ਕਿਹੜਾ ਗਿਆਨ ਆਪਣੇ ਮੂਲ ਦਾ ਗਿਆਨ ਜੇ ਮੂਲ ਦਾ ਗਿਆਨ ਖਾਂਦਾ ਤਾਂ ਮੂਲ ਦਾ ਦਰਸ਼ਨ ਵੀ ਹੁੰਦਾ ਤੇ ਮੂਲ ਜ ਸਮਾ ਵੀ ਜਾਂਦਾ ਤੇ ਉਹ ਹੋਇਆ ਹੀ ਸਾਡਾ ਕੀ ਰਿਆ ਖਾਂਦਾ ਰਿਆ ਖਾਣ ਸਾਥੀਆਂ ਸਾਖੀਆਂ ਸੁਣਦਾ ਰਿਹਾ ਉਹ ਤੇ ਪੀ ਲਾਣਾ ਸੀ ਗੁਰਦੀ ਤਾਂ ਉਹ ਹੀ ਨਹੀਂ ਐ ਸਾਥੀਆਂ ਚ ਥੋੜੇ ਇਤਿਹਾਸ ਦੀਆਂ ਗੱਲਾਂ ਕਰਦੇ ਨੇ ਮਤਮਰੀ ਹੋਈ ਤਾਂ ਹੀ ਦੀ ਕਿਹਦੀ ਦਾ ਗਿਆਨ ਨਹੀਂ ਨੂੰ ਗਿਆਨ ਹੋਵੇ ਕਿਹਦਾ ਉਹ ਹਜ਼ਾਰ ਜਨਮ ਲੈ ਲੈਣ ਉਹ ਹਜ਼ਾਰ ਜਨਮ ਸੁਣ ਲੈਣ ਸਾਥੀਆਂ ਠੀਕ ਐ ਜੀ ਇੱਥੇ ਆ ਸੰਮਾਲੇ ਆਖਰ ਸੱਸੇ ਦੇ ਟਿੱਪੀ ਲਾਏ ਹੋਏ ਮੰਮੇ ਦੇ ਪੈਰ ਚ ਹਾ ਲਾਇਆ ਹੋਇਆ ਕੀ ਬਣਾਗੇ ਇਹਨੂੰ ਜੀ ਟਿੱਪੀ ਲਾਉਣੀ ਸੀ ਸਮਹਾਲ ਲਿਆ ਕਹਿਣਾ ਸੀ ਅੱਛਾ ਤੇ ਹਾਹਾ ਵੀ ਲੱਗਿਆ ਸਮਹਾਲ ਲਿਆ ਹੋ ਗਿਆ ਫਿਰ ਤਾਂ ਯਾਰ ਹਾ ਬੋਲਦੇ ਆ ਹਾਲ ਲੱਗਿਆ हट ਜਾਂਦਾ ਹੈ ਸੰਭਲਿਆ ਨਹੀਂ ਉਹ ਆਪ ਆਪਣਾ ਆਪ ਸੰਭਲ ਨਹੀਂ ਸਕਿਆ ਹਾਂਜੀ ਗੱਲੀ ਹੋਂ ਸੁਹਾਗਣ ਪੈਣੇ ਕੰਤਨਾ ਕਬ ਹੂੰ ਮੈਂ ਮਿਲੇਆ ਗੱਲ ਨਾ ਬਤਾਣੇ ਖਾਲਸਾ ਬਣੇ ਫਿਰਦੇ ਨੇ ਖਾਲਸਾ ਨਾਲ ਲਾਤਾ ਹਰੇ ਕੇ ਚੱਕ ਕੇ ਖਾਲਸਾ ਲਾ ਦਿੰਦੇ ਨਾਲ ਗੱਲ ਨਾ ਬਤਾ ਲੋ ਗੱਲੀ ਬਾਤੀ ਸੁਆਦਨ ਭੈਣੇ ਕੰਤਕ ਤੇ ਮਿਲਿਆ ਨਹੀਂ ਨਾ ਦੇਖਿਆ ਨਾ ਮਿਲਿਆ ਸੱਚ ਦਾ ਦਰਸ਼ਨ ਨਾ ਕਦੇ ਹੋਇਆ ਜੇ ਹੁੰਦਾ ਤਾਂ ਸੱਚ ਦੱਸ ਕੀ ਹੈ ਸੱਚ ਜੇ ਗੁਰਬਾਣੀ ਚੋਂ ਸੱਚ ਦਾ ਦਰਸ਼ਨ ਹੋਇਆ ਗੁਰਬਾਣੀ ਸੁਝਾਉਂਦੇ ਕੀ ਹੈ ਖਾਲਸਾ ਨਾਲ ਲਾਤਾ ਰਾਜ ਕਰੇਗਾ ਖਾਲਸਾ ਖਾਲਸੇ ਨਾਲ ਸੀ ਰਾਜ ਕਰਨਾ ਕੀਤਾ ਹੋਇਆ ਇਹ ਸਭ ਪਖੰਡਵਾਦ ਹੈ ਪਖਾਂਡਰ ਨੂੰ ਨਾ ਹੋਏ ਜਾਂਦਾ ਹੁੰਦਾ ਕਿੰਨਾ ਜੇ ਰੋਹੂ ਕੋਹਾਂ ਦੇ ਠੀਕ ਹੈ ਜੀ ਤੇ ਗੁਰੂ ਅਮਰਦਾਸ ਜੀ ਦਾ ਕੋਈ ਉਪਦੇਸ਼ ਨਹੀਂ ਜੀ ਨੰਨੇ ਅੱਖਰ ਤੋਂ ਗੌੜੀ ਪੌੜੀ ਹੈ ਜੀ ਉਪਦੇਸ਼ ਨੰਨੇ ਅੱਖਰ ਦਾ ਜੀ ਪੌੜੀ ਨਰਕ ਪਰੇ ਤਨ ਨਾਮ ਵਸਾਈ ਜਿਨ੍ਹਾਂ ਵਨ ਹੀ ਤਾਨ ਹੈ ਸਾਡਾ ਹਿਰਦੇ ਵਿੱਚ ਵਨ ਵਿੱਚ ਨਾਮ ਵਸ ਜਾਂਦਾ ਹੈ ਉਹ ਕਹਿੰਦੇ ਨਰਕ ਦੀ ਜਾਂਦੇ ਉਹਨਾਂ ਦੀ ਉਹ ਬੁੱਧ ਉਹ ਡਾਊਨ ਫਾਲ ਨਹੀਂ ਹੁੰਦੇ ਉਹਨਾਂ ਦੀ ਬੁੱਧੀ ਥੱਲੇ ਰੂਣੀ ਜਾਂਦੀ ਥੱਲੇ ਦੀਆਂ ਜੁ ਚ ਨਹੀਂ ਜਾਂਦੇ ਉੱਪਰ ਨੂੰ ਜਾਂਦੇ ਉਹ ਨੂੰ ਜਾਂਦੇ ਆਦਮੀ ਤੋਂ ਕਾਹ ਕੀ ਆਦੀ ਤੋਂ ਕਾਹ ਦੇਵਤਾ ਦੇਵਤੇ ਤੋਂ ਕਾਹ ਦੀ ਹੈ ਦੇਵਤੇ ਤੋਂ ਕਾਹ ਮੁਕਤੀ ਜਿੰਨ ਮਾਨਸ ਦੇਵਤੇ ਕੀ ਆਦਮੀ ਤੋਂ ਕੀ ਬਣਿਆ ਦੇਵਤਾ ਦੇਵਤੇ ਤੋਂ ਕਾਹ ਕੀ ਮੁਕਤ ਹੋ ਗਿਆ। ਕੁਰਤੀ ਤੋਂ ਕ ਕੀ ਹੈ? ਕੁਰਤੀ ਤੋਂ ਕ ਜਨਪਦਾਵਤਾ। ਗਿਆਨ ਹੈ। ਮੁਕਤ ਬੱਕਰੀ ਵੀ ਗਿਆਨੀ ਚਾਗਾ ਹੈ। ਸਾਡਾ ਸਾਰੇ ਦਾ। ਦੇ ਵਿੱਚ ਸਮਾ ਜਾਣਾ ਹੁਕਮ ਰੂਪ ਹੋ ਜਾਣਾ। ਇੱਕ ਹੋ ਕੇ ਉੱਗ ਜਾਣਾ। ਸਮਝ ਨਾਮ ਨਿਧਾਨ ਗੁਰਮੁਖੀ ਜੋ ਜਪਤੇ ਬਿਖ ਮਾਇਆ ਮੈਂ ਨਾ ਉਹ ਇੱਕ ਹੱfte। ਜਿਹੜੇ ਨਾਮ ਲਿਦਾ ਜਪਦੇ ਨੇ ਹਰ ਅਮਰਤ ਨਾਮ ਦਾ ਹੈ ਜਿਹੜੇ ਇਹ ਜਪਦੇ ਨੇ ਗੁਰਬਾਣੀ ਵਿੱਚ ਨਾਮ ਸਮਾਇਆ ਗੁਰਬਾਣੀ ਹਰ ਨਾਮ ਸਮਾਇਆ ਜਿਹੜੇ ਗੁਰਬਾਣੀ ਨੂੰ ਜਪਦੇ ਨੇ ਗੁਰਬਾਣੀ ਨੂੰ ਬੁਲਾਉਂਦੇ ਨੇ ਰੜਕਦੇ ਨੇ ਸਮਝਦੇ ਨੇ ਗੁਰਪ੍ਰੀ ਦਾ ਮੰਤਨ ਕਰਦੇ ਨੇ ਗੁਰਬਾਣੀ ਨੂੰ ਖੋਜਦੇ ਨੇ ਉਹ ਨਾਮ ਜਪਦੇ ਨੇ ਉਹੀ ਨਾਮ ਜਪਣਾ ਉਹ ਨਾਮ ਜਪਣਾ ਚਾਹੀਦਾ ਵੈਰ ਨੂੰ ਵੈਰ ਕਰਨਾ ਨਾਮ ਜਪਣਾ ਉਹ ਹਾਰਟ ਵੀ ਟੂ ਟੂ ਕਰੇ ਅਤੇ ਹਾਰਟ ਵੀ ਟੂ ਟੂ ਕਰਦਾ ਉਹ ਨਾਮ ਜਪਦਾ ਗੁਰਬਾਣੀ ਦੀ ਬਹੁਤ ਬਹੁਤ ਕਿਹੜੇ ਵਜਲ ਨੂੰ ਨਾਸਤੇ ਕਹੇਦੇ ਇੱਕ ਸ਼ਾਮ ਨੂੰ ਜਿਹੜਾ ਵਾਰ ਵਾਰ ਰੰਦਾ ਉਹਨੂੰ ਕੁੱਤਾ ਭੌਂਕਣਾ ਗਿਆ ਕੁੱਤੇ ਭੌਂਕਣ ਦੀ ਸਮਝ ਹੈ ਗੁਰਬਾਣੀ ਦੀ ਇੱਥੇ ਤੱਕ ਤਾਂ ਗੁਰਬਾਣੀ ਕਹਿੰਦੀ ਹੈ ਉਹ ਤਾਂ ਕਿਉਂ ਕਰੀ ਜਾਂਦੇ ਨੇ ਫਿਰ ਵੀ ਕਰੀ ਜਾਂਦੇ ਦੇਖੋ ਗੁਰਬਾਣੀ ਤਾਂ ਉੱਤੇ ਹੀ ਜਪ ਆਇਆ ਪਹਿਲਾਂ ਹੀ ਹਾਂਜੀ ਜਪਦੇ ਨਾਲ ਸਤ ਗੁਰਬਾਣੀ ਸ਼ੁਰੂ ਹੋ ਗਈ ਜਿਨ੍ਹਾਂ ਨੇ ਗੁਰਬਾਣੀ ਜਪੀ ਹੈ ਸਮਝੀ ਹੈ ਗਿਆਨ ਜਪਿਆ ਗੁਰਬਾਣੀ ਦਾ ਐਸਾ ਗਿਆਨ ਜਪੋ ਵਨ ਮੇਰੇ ਐਸਾ ਕੈਸਾ ਗੁਰਬਾਣੀ ਦਾ ਗਿਆਨ ਜਪੋ ਜੇ ਜਪਣਾ ਤੁਸ ਵੀਰਾਂ ਨੇ ਇਹ ਗਿਆਨ ਜਪਿਆ ਗੁਰਬਾਨੀ ਦਾ ਸਮਝਿਆ ਵਿਚਾਰੇ ਹੈ ਗੁਰਬਾਨੀ ਨੂੰ ਖੋਜਿਆ ਇਹਨਾਂ ਖਰਾਬ ਨੇ ਕੋਈ ਗੁਰਮੁਖ ਖੋਜੇ ਇਹ ਅੱਖਰ ਨੇ ਗੁਰਬਾਨੀ ਦੇਣਾ ਖੋਜਣਾ ਸੀ ਛੱਡ ਦਿੱਤਾ ਸਾਰਾ ਹੀ ਉਹ ਨਹੀਂ ਨਰਕ ਗਿਆ ਹੋਈ ਹਾਂਜੀ ਬਿਖ ਮੈਂ ਨਾ ਉਹ ਉਹ ਬਿਖ ਮਾਇਆ ਜਿਵੇਂ ਖਪੂ ਬਿਖ ਮਾਇਆ ਦੇ ਕਪੜੇ ਨਰਕ ਚ ਰਹਿਣਾ ਨਰਕੇ ਹੈ ਸੰਸਾਰ ਇਹ ਸੰਸਾਰ ਹੈ ਨਰਕਾ ਹੋਰ ਤੇ ਨਹੀਂ ਇਹ ਤੇ ਜੂਨਾ ਨੇ ਪੈੜੀਆਂ ਪੈੜੀਆਂ ਜੂਨਾ ਨਰਕ ਨੇ ਚੰਗੇ ਚੰਗੇ ਜੁਨਾਦਵੀ ਜੂਦ ਸਮਝ ਲੋੁਰਗਦੀਆ ਹਾਂਜੀ ਇਹਦਾ ਭਾਵ ਹੈ ਵੀ ਇੱਥੇ ਜਿਹੜਾ ਜਬ ਤੱਕ ਖਰਾਇਆ ਨਿਰਖਤ ਵਾਸਤੇ ਆਇਆ ਹਾਂ ਜੀ ਨਿਰਖਰ ਨਿਰਖਰ ਜਬ ਜਾਏ ਪਾਵਾਂ ਵਾਸਤੇ ਜਾ ਪਾਇਆ ਰੱਬਾ ਹਾਂਜੀ ਨਾਨਾ ਕਾਰ ਨਾ ਹੋਤਾ ਦੀਨੋ ਜਾ ਕੋ ਇਨਕਾਰ ਕਰਦੋ ਨੂੰ ਕੋਈ ਇਨਕਾਰ ਹੀ ਜਦ ਮਰਜੀ ਜਾਣ ਜਦ ਮਰਜੀ ਉਹਨ ਕੋਈ ਪਾਸਪੋਰਟ ਨਹੀਂ ਕੋਈ ਨੀ ਪੁੱਛਦਾ ਵਰਮਖ ਆਏ ਜਾਏ ਦਸੰਦ ਚਾਹੋ ਆਏ ਇੱਧਰ ਆਉਣ ਚਾਹੇ ਉੱਧਰ ਆਉਣ ਨਾਮ ਮੰਤਰ ਕੀ ਹੈ ਆ ਗੁਰਬਾਣੀ ਵੀ ਨਾਮ ਮੰਤਰ ਹੈ ਪਰ ਉਹ ਨਾਮ ਮੰਤਰ ਜਿਹੜਾ ਹੈਗਾ ਉਹ ਧੁਰ ਬਾਣੀ ਹੈ ਨੂੰ ਨਾਮ ਦੇਤਾ ਉਹਨਾਂ ਨੂੰ ਕੋਈ ਕਿਤੋਂ ਵੀ ਨਾਨਕਾਰ ਨਹੀਂ ਹੈ ਨਿਕਾਰੇ ਵੀ ਉਹਨਾਂ ਕੋ ਚਾਰੇ ਪਦਾਰਥ ਠੀਕ ਨਾਮ ਮੰਤਰ ਨਾਮ ਪਦਾਰਥ ਹੈ ਹਾਂ ਨਾਮ ਪਦਾਰਥ ਹੈ ਕਿਉਂਕਿ ਨਾਮ ਤੇ ਵੀ ਔਂਕੜ ਹੈ ਮੰਤਰ ਤੇ ਵੀ ਔਂਕੜ ਹੈ ਹਾਂਜੀ ਠੀਕ ਜੀ ਨਾਮ ਮੰਤਰ ਗੁਰਦੀਨੋ ਜਾ ਕੋ ਸਤਗੁਰੂ ਨਾਮ ਬਖਸ਼ਦਾ ਸਤਗੁਰ ਤੇ ਨਾਮ ਪਾਏਗਾ ਹੀ ਮੇਰੇ ਕੋ ਮੋਬਾਈਲ ਹੈ ਮੋਬਾਈਲ ਦੇ ਥਰੂ ਹੀ ਸੁਣਦਾ ਮੈਨੂੰ ਤੁਹਾਡੀ ਗੱਲ ਵੇਰੇ ਆ ਸੁਣਦੀ ਹੈ ਜੇ ਮੋਬਾਈਲ ਵਿੱਚੋਂ ਹਟਾ ਦਈਏ ਸਤਗੁਰ ਦਾ ਹੈ ਸੁਣ ਸਾਡਾ ਸਾਡੇ ਕੋਲ ਜੋ ਕਰਦੇ ਸਤਗੁਰ ਕੋਲ ਨੇ ਸਾਲੇ ਕੋਲਕਾ ਦੂਏ ਨੇ ਡੁਪਲੀਕੇਟ ਕਰਨ ਉਹਦੇ ਸਰਬੰਨੇ ਸਤਗੁਰ ਕੋਲ ਨੇ ਉਹਦੇ ਨਾਲ ਸੁਣਦਾ ਸਰਬਣੀ ਸੁਣਨਾ ਕੋਲ ਨਾ ਉਹ ਤਰਾਪਾਂ ਦੀ ਆਵਾਜ਼ ਉਹਨਾਂ ਨਾਲੇ ਸੁਣਦੀ ਐ ਉੱਦਾਂ ਲਿਆਂ ਨਿਦਾਨ ਹਰ ਅੰਮ੍ਰਿਤ ਪੂਰੇ ਨਾਨਕ ਅਨਹਦ ਤੂਰੇ ਨਿਦਿ ਨਿਦਾਨ ਕੀਤੀ ਉੱਤਖਿਆਣਾ ਨਿਦਾਨ ਲੋਭ ਦਾ ਨਾਮ ਦਾ ਪੂਰਾ ਦਾ ਪੂਰਾ ਗਿਆਨ ਆਉਣਾ ਹੋ। ਪੂਰੇ ਦਾ ਪੂਰਾ ਨਾਮ ਨਿਧਾਨ ਹੈ, ਅਰਮਰਤ ਨਾਮ ਨਿਧਾਨ। ਪੂਰੇ ਗਿਆਨ ਦੇ ਹੀ ਆ ਕੇ ਬੈਠੇ ਹਾਂ। ਪੂਰਾ ਦੇਤਾ, ਇਹਦਾ ਵਿਚਦਾ ਨਿਮਰਤਾ ਗਿਆ ਨਾਨਕ ਅਨਹਦ ਤੂਰੇ। ਸ਼ਬਦ ਗੁਰੂ ਪ੍ਰਗਟ ਹੋ ਗਿਆ। ਨਾਦ ਵੱਜ ਗਿਆ ਉਹਨਾਂ ਦੇ ਅੰਦਰ। ਗੁਰਮੁਖੀ ਨਾਦਮ। ਗੁਰੂ ਦੇ ਅੰਦਰ ਗੁਰਮੁਖੀ ਵੇਦਮ, ਗੁਰਮੁਖ ਦੇ ਰੋ ਨਾਦ ਦਾ ਦੱਸਦੇ। ਜਿਹੜਾ ਲੋਕਾਂ ਨੂੰ ਦੱਸਿਆ ਉਹ ਵੇਦ ਹੈ ਜਿਹੜਾ ਆਪ ਸੁਣਿਆ ਉਹ ਨਾਦ ਹੈ ਜਿਹੜਾ ਸੁਣਿਆ ਉਹ ਨਾਦ ਹੈ ਜਿਹੜਾ ਦੱਸਿਆ ਵੇਦ ਦਾ ਗਿਆਨ ਹੈ ਤੇ ਬੋਲਿਆ ਉਹ ਵੇਦ ਹੈ ਜੇ ਸੁਣਨਾ ਦਿੱਤਾ ਬੋਲਣ ਦਿੱਤਾ ਗਿਆਨ ਜੋ ਬੋਲਿਆ ਗਿਆਨ ਹੈ ਜੋ ਸੁਣਿਆ ਉਹ ਨਾਦ ਤੂਰੇ ਸੁਣਿਆ ਬੋਲਿਆ ਕੀ ਹੈ ਸੁਣਿਆ ਨਾਦ ਬੋਲਿਆ ਵੇਦ ਹੈ ਤੇ ਬੋਲ ਕੇ ਦੱਸਿਆ ਵੇਦ ਦੱਸਿਆ ਗਿਆਨ ਹੈ ਹਾਂਜੀ ਐਂਡ ਆ ਪਾਬੀ ਸੁਣਿਆ ਬਾਣੀ ਗੁਰੂ ਐ ਤੇ ਦੱਸੀ ਗੁਰਬਾਣੀ ਐ ਜੀ ਹਾਂ ਗੌੜੀ है, ਪੰਜਵੇਂ ਜੀ ਹਾਂ ਜੀ ਉਹ ਕਹਿੰਦੇ ਜੇਤਾ ਬੋਲਣ ਤੇਤਾ ਗਿਆਨੈ ਜੇਤਾ ਸੁਣਤਾ ਤੇਤਾ ਨਾਮ ਜੇਤਾ ਪੇਖਤ ਤੇਤਾ ਧਿਆਨ ਤੇਤਾ ਧਿਆਨ ਧਿਆਨ ਵਿੱਚ ਜਾਣਿਆ ਧਿਆਨ ਵਿੱਚ ਜਾਣਿਆ ਸਭ ਕੁਝ ਜੋ ਦੇਖਿਆ ਜੋ ਸੁਣਿਆ ਉਹ ਨਾਮ ਹੈ ਜੋ ਬੋਲਿਆ ਉਹ ਗਿਆਨ ਹੈ ਉਸ ਤਰੀਕੇ ਨਾਲ ਗੱਲ ਇੱਕੋ ਹੀ ਪੰਗਤੀ ਚ ਕਹੇ ਸੀ ਸਾਰੀ ਉਹ ਗੋਲਕ ਧਿਆਨ ਹੈ ਗੁਰੂ ਧਿਆਨ ਵਾਲੇ ਨੇ ਇੱਕ ਗੋਲਕ ਧਿਆਨ ਵਾਲੇ ਨੇ ਠੀਕ ਹੈ ਜੀ ਤੇ ਨੰਨੇ ਅੱਖਰ ਦਾ ਜੇ ਆਪਾਂ ਭਗਤ ਕਬੀਰ ਜੀ ਤੋਂ ਗੱਲ ਸ਼ੁਰੂ ਹੋਈ ਸੀ ਕਿ ਉਹਨਾਂ ਨੇ ਨਿਰਖਤ ਤੇ ਜ਼ੋਰ ਲਿਆ ਨੰਨਾ ਇਸ ਦਿਨ ਨਿਰਖਤ ਜਾਈ ਵੀ ਵਿਚਾਰ ਸ਼ਬਦ ਵਿਚਾਰ ਜ਼ਰੂਰੀ ਹੈ ਖੋਜੋ ਸ਼ਬਦ ਵਿਚਾਰ ਖੋਜੇ ਹਾਂਜੀ ਹਾਂਜੀ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜਿਹੜੇ ਉਹ ਖੋਜ ਨਹੀਂ ਕਰਦੇ ਉਹਨਾਂ ਨੂੰ ਨਾ ਡੀਠਾ ਨਾ ਸੰਭਾਲਿਆ ਨਾ ਤਾਂ ਉਹਨਾਂ ਤੋਂ ਕਦੇ ਦੇਖ ਆਪਣਾ ਮੂਲ ਤੇ ਨਾ ਕਦੇ ਉਹ ਸੰਭਾਲ ਸਕਦੇ ਉਹਨੂੰ ਸਮਝ ਵੀ ਨਹੀਂ ਆਉਣੀ ਉਹਨਾਂ ਨੂੰ ਸੰਭੜ ਵੀ ਨਹੀਂ ਸਕਦਾ ਉਹਨਾਂ ਦਾ ਆਪਾਂ ਆਪਾ ਸੰਭੜ ਲਈ ਨਹੀਂ ਉਹ ਮਾਇਆ 'ਚ ਡੋਲਣਗੇ ਜਿਹੜਾ ਸੰਭੜ ਜਾਂਦਾ ਡੋਲਦਾ ਨਹੀਂ ਫਿਰ ਉਹ ਠੀਕ ਹੈ ਜੀ ਤੇ ਫਨ ਵਿੱਚ ਪਾਸਛਣੇ ਦਸਤਾ ਵੀ ਜਿਹੜਾ ਨਿਰਖਤ ਕਰੇਗਾ ਉਹ ਨਰਕ ਨਹੀਂ ਜਾਏਗਾ ਕਦੇ ਵੀ ਉਹਨਾਂ ਨੇ ਡੋਲਣਾ ਕਹਿਤਾ ਇਹਨਾਂ ਨੇ ਡੋਲਰ ਨੂੰ ਡਰ ਕਹਿਤਾ ਠੀਕ ਹੈ ਜੀ ਡੋਲ ਨਹੀਂ ਡਰ ਕੇ ਜਾਣ ਜਿਨ੍ਹਾਂ ਨੇ ਨਾਮ ਨਿਦਾਨ ਗੁਰਮੁਖ ਦੇ ਰੂਪ ਵਿੱਚ ਹੋ ਕੇ ਜਪਿਆ ਜਾਣਿਆ